ਰਾਮ ਕਲੀ ਮਹਲਾ ਤੇ ਜਾਨਾਂ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਂ ਆਏ ਸਤਿਗੁਰੂ ਮੈਂ ਪਾਇਆ ਸੰਤ ਗੁਰ ਤਾਂ ਪਾਇਆ ਸਹੇਤੀ ਮਨਵਦੀਆ ਬਾਧਾ ਆਇਆ ਰਾਖਤਨ ਪਰਵਾਰ ਪਰਿਆ ਸਬਦ ਕਸਾ ਕੋਵਾ ਯਾ ਕਚਾ ਤੁਮ ਆਈਸ ਤੇ ਕਸਾ ਪੁਜਾ ਇਤਹਾ ਕੁਰਬਾਨ ਕੀਤਾ ਘੂਟ ਜਿਸ ਆਏ ਵੜਿਆ ਕਹਿਨਾਂ ਸੁਨਾ ਸਤ ਸੰਤ ਰਖਿਆ ਸੱਚਾ ਨਾਮਿਆ ਆਗਰ ਵਾਜੇ ਪੰਚ ਸਤਿਕਾਰ ਸਪਾਗਾ ਖਾਂ ਸਪਾਗਾ ਸਬਦ ਵਾਜੇ ਖਲਾ ਜਿੱਤ ਤਾਲੀਆਂ ਪਲਿਤ ਤੁਲ ਵਸ ਕੀਤੇ ਕਾਰਕੰਡਕ ਮਾਰਿਆ ਤੂੰ ਕਰਨ ਪਾਇ ਤੁਝ ਕੋ ਸੇ ਨਾਮ ਹਰ ਖਲਾ ਕਹਿਨਾਂ ਤਸਮੋ ਹਤ ਕਰਨਦ ਵਾਜੇ ਅਣ ਸਰੋਵਰ ਪਾਦੀ ਸੰਗ ਲੋਟ ਪੂਰੇ ਭਗਤ ਪਾਇ ਉਦੈ ਸਭ ਸੂਰ ਤੂੰ ਬੋਸੰਦਾ ਵੀ ਤ੍ਰੇ ਸਰਦੋਈ ਦਾ ਆਈਆ ਖੇਲਾ ਸਗਲ ਜਗਤ ਚੰਗਿਆਈਆ ਬਰਿਆਈਆ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੜਾ ਕੇ ਦੂਰ ਜਿਨੇ ਨਾਮ ਤੇ ਆਇਆ ਗੈਮ ਸਕਤ ਕਾਲ ਨਾਨਕ ਤੇ ਮੁਖ ਉਜਲੇਖ ਕੀਤੀ ਛੁਟੀ ਨਾ